शलोक महला दूसरा सावन आया हे सखी कंता चित्त करयो नानक चूर मरै दुहागणी जिन अवरी लागा नेह सावन आया हे सखी ये सखी सावन आया है नामनी बरखा है आनंद दी व्याख्या है सच प्रकट होण लगया है ਕੰਟੈਟ ਕਰ ਕਰਿਓ ਤਾਂ ਕਿ ਤਾਕਤ ਲੈ ਹੁਣ ਕਰਤਾ ਇਹ ਤਦਰਾ ਰਿਆ ਸੰਸਾਰ ਸੰਸਾਰ ਚ ਕੰਤ ਸਾਰੇ ਗੱਲ ਚੱਲ ਰਹੀ ਹੈ ਤੂੰ ਵੀ ਕਿਤੇ ਕਿ ਕੰਤ ਦਾ ਜੇ ਤਾਕਤ ਲੈ ਨਾਲ ਕੁ ਜੂੜ ਮਰੇ ਤਾਂ ਅਗੜੀ ਜੜੀ ਹੁਲਵੇਂ ਜੇ ਤਾਕਤ ਸਾਡੀ ਉਹ ਅਗੜੀ ਦੇ ਹੋ ਜਿਹੜੇ ਹੁਲਵੇਂ ਤੇ ਆਂਦੀ ਆਉਂਦਾ ਕੰਤ ਦਾ ਦੋਹਾ ਗੜੀ ਦੇ ਜਿਹੜੀ ਆਪਣੇ ਨਾ ਤਾਂ ਲਿਓ ਉਹਨਾਂ ਦਾ ਹੋਰ ਪਾਸੇ ਮੋ ਲੱਗਿਆ ਹੋਇਆ ਉਹਨਾਂ ਦਾ ਹੋਰ ਪਾਸੇ ਧਿਆਨ ਝਟਿਆ ਹੋਇਆ ਉਹ ਮਾਇਆ ਮੋੜ ਫਸੇ ਨੇ ਵੱਡੇ ਕੰਨ ਚ ਲੱਗੇ ਨੇ ਕੋਈ ਖਾਲਸਤਾਨ ਦੇ ਹੀਲੇ ਚ ਲੱਗੇ ਆ ਕੋਈ ਇਸਲਾਮ ਸਾਰੀ ਧਰਤੀਆਂ ਚ ਫਲਾ ਦੇਣਾ ਉਦੋਂ ਲੱਗਿਆ ਹੋਇਆ ਹੈ ਫਰਾਵਲ ਕਿਸੇ ਦਾ ਧਿਆਨ ਦੀ ਬਾਹੁਰੂ ਵਾਲ ਕਿਸੇ ਦਾ ਧਿਆਨ ਦੀ ਕੰਨ ਦਾ ਕਿਸੇ ਨੂੰ ਪਤਾ ਆਪਣੇ ਆਪਣੇ ਹੰਕਾਰ ਚ ਲੱਗੇ ਹੋਏ ਨੇ ਹੰਕਾਰ ਚ ਹਾਂਜੀ ਮਹੱਲਾ ਦੂਜਾ ਸਾਵਣ ਆਇਆ ਹੈ ਸਖੀ ਜਲਹਰ ਵਰਸਣ ਹਾਰ ਨਾਨਕ ਸੁਖੀ ਸਵਣ ਸੋਹਾਗਣੀ ਜਿਨ ਸਹ ਨਾਲ ਪਿਆਰ ਸਵਣ ਆਯਾ ਹੈ ਸਖੀ ਜਲ ਹਰ ਵਰਸਨ ਜਲ ਹਰ ਵਰਸਨ ਹਾਰ ਹਰਨ ਲੱਗਿਆ ਹੋਇਆ ਇਹ ਜਲ ਸਾਡਾ ਨਹੀਂ ਹੈ ਇਹ ਪਰਮੇਸ਼ਰ ਦਾ ਮੀਂਹ ਵਰਸਾਇਆ ਹੋਇਆ ਹੈ ਇਹ ਹਰ ਰੂਪ ਜਲ ਹੈ ਇਹ ਅਮਰ ਨਾਮ ਵਰਸਦਾ ਹੈ ਵਰਸਨ ਹਾਰ ਨਾਨਕ ਸੁਖ ਸਵਣ ਸੋਹਾਗਣੀ ਯੋਗ ਤਾਂ ਆਗੜੀ ਦੇ ਬੜੇ ਸੁਖ ਨਾਲ ਤਾਂ ਜਾਣਾ ਉਹਨਾਂ ਨੂੰ ਵੱਡੀ ਖੁੜੀ ਦੀਨ ਆਉਣੀ ਏ ਤਾਂ ਆਗੜੀ ਜਿਸ ਨਾਲ ਨਾਲ ਪਿਆਰ ਜਿਸ ਨਾਲ ਨਾਲ ਪਿਆਰ ਹੈ ਉਹਨਾਂ ਪਹਿਲਾਂ ਤਾਂ ਦੀਨੇ ਨਹੀਂ ਆਈ ਜਦੋਂ ਵਿਛੋੜਾ ਰਿਹਾ ਹਾਂਜੀ ਇਤਨੀ ਗੱਲ ਹੋ ਰਹੀ ਏ ਜੀ ਹਾਂ ਹਾਂ ਇਤਨੀ ਗੱਲ ਹੋ ਰਹੀ ਅੱਛਾ ਬੁੱਧੀ ਨੂੰ ਕਹਿ ਰਹੇ ਆਂ ਜਿਹੜੀ ਬੁੱਧੀ ਦਾ ਚੇਤਨ ਪ੍ਰੇਮ ਹੈ ਉਹ ਸੁਖੀ ਰਹਿਣਗੀਆ ਜਿਹੜੀ ਮਾਇਆ ਨਾਲ ਜੁੜੀ ਹੋਈ ਜਾਂ ਬੋਲ ਨਾਲ ਜੁੜੀ ਹੋਈ ਜਾਂ ਦੁਹਾੜੀ ਜੁੜੀ ਹੋਈ ਹੈ। ਠੀਕ ਹੈ ਦਾ ਭਾਣੇ ਕਾਇ ਇਹ ਕਿਤਨੂੰ ਜੁੜੇ ਨਹੀਂ। ਭਾਣੇ ਚਾਉਣ ਦੀ ਗੱਲ ਕਰਦੀ ਹੈ ਗੁਰਬਾਣੀ ਪਹਿਲਾਂ ਸਭ ਤੋਂ। ਹਾਂ ਜੀ। ਪੌੜੀ ਆਪੇ ਛਿੰਝ ਪਵਾਏ ਮੱਲਾ ਖਾੜਾ ਰੱਜਿਆ ਲੱਥੇ ਪੜਤੂ ਪਾਏ ਗੁਰਮੁਖੀ ਮੱਛਿਆ ਆਪੇ ਛਿੰਝ ਪਵਾਏ ਮੱਲਾ ਖਾੜਾ ਰੱਜਿਆ ਅਚੇਦਿਕ ਨੇ ਪਾਈ ਸੀ ਦਸ ਸਾਲ ਬਾਰਾਂ ਸਾਲ ਹੋ ਗਏ ਉਹ ਜਿਹੜੇ ਅਟਾਇ ਕੀਤੇ ਗਏ ਨੇ ਅਬਰਤ ਦਸਬਗਰੰਤ ਨੇ ਛੰਕੇ ਪਾਏ ਗਏ ਨੇ ਗੁਰਬਾਣੀ ਦੇ ਛਿੱਛੀ ਤੇ ਉਹਨੇ ਆਪੇ ਉਗਲ ਦੇ ਕੇ ਪਾਈ ਸਾਰਿਆਂ ਤੋਂ ਜੇ ਰੋਲਾ ਪਊਗਾ ਤਾਂ ਰੋਖ ਹੋਊਗੀ ਤਾਂ ਵਿੱਚੋਂ ਮੱਖਣ ਨਿਕਲੂਗਾ ਜਿਕੇ ਟਕਾਏ ਨਹੀਂ ਜਦ ਮੱਖਣ ਜਮੇ ਨਿਕਲੇਉ ਆਪੇ ਛਿੱਜ ਪਾਏ ਮੱਲਾ ਖਾੜਾ ਰੱਜਿਆ ਪਹਿਲਵਾਨ ਆ ਗਏ ਵਿਦਵਾਨ ਆ ਗਏ ਖਾੜੇ ਦੇ ਵਿੱਚ ਆਪਣੀ ਆਪਣੀਆਂ ਜਿੰਨੀਆਂ ਜਿੰਨੀਆਂ ਕੋਲ ਬੁੱਧੀ ਸੀ ਜਿੰਦੀ ਸੋ ਉਹਨੇ ਉਹਨੇ ਇੱਕ ਤੀਰ ਚਲਾਇਆ ਉਹਨਾਂ ਨੇ ਤਲਵਾਰਾਂ ਚਲਾਈਆਂ ਇਹਦੇ ਨੇ ਕੁਛ ਕੀਤਾ ਕਿਸੇ ਨੇ ਕੁਛ ਕੀਤਾ ਆਪਣੇ ਆਪਣੇ ਕਰਤਬ ਦਿਖਾਏ ਬੁੱਧੀ ਦੇ ਮੱਲਾ ਖੜਾ ਲੱਚਿਆ ਹਾਂਜੀ ਥੇ ਪਰਥੂ ਪਾਏ ਗੁਰਮੁਖੀ ਮੱਚਿਆ ਹਾਂ ਲੱਥੇ ਪਰਥੂ ਪਾਏ ਤੇ ਪਰਥੂ ਪੈ ਗਿਆ ਜਿਆਦਾ ਹੀ ਸਹੇ ਗੁਰਮਖਾਇਆ ਬਾਹਰ ਫੇਰ ਕੋਈ ਮੁਕਮਤੀਆ ਪਰ ਉਹਨੇ ਕੀਤਾ ਚੱਲਣਾ ਵੀ ਆ ਜਾ ਬਈ ਜੀ ਨੇ ਹੁਣ ਗੱਲ ਤਾਂ ਆਹ ਹੈ ਉਹ ਬੱਚਿਆ ਉਹਦੇ ਅੰਦਰ ਗਿਆਨ ਬੱਚਿਆ ਜਾਣਨ ਪਾਤਾ ਉਹਨੇ ਰੋਸ਼ਨੀ ਕੀਤੀ ਰੋਸ਼ਨੀ ਉਹ ਉਹ ਰੋਸ਼ਨੀ ਤੇ ਸਾਰੇ ਦੁਗਏ ਹੋ ਗਏ ਸਾਰਿਆਂ ਦਾ ਹੀ ਨਾਮ ਯਾਹਰ ਹੋ ਗਿਆ ਰੋਸ਼ਨੀ ਤੇਰੇ ਕਿ ਸ਼ਾਲਾ ਮਾਨਦੇ ਤੇ ਹਾਂ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਐ ਮਨਮੁਖ ਪਛਾੜ ਵਿਚਾੜ ਕੇ ਦੂਰ ਮਾਰੇ ਖਾੜੇ ਚੋਂ ਬਾਹਰ ਮਾਰੇ ਜਾਕੇ ਕੱਚੇ ਸੀ ਮੂਰਖ ਦੀ ਜਿਹੜੇ ਕੱਚੀਆਂ ਗੱਲਾਂ ਕਰਦੇ ਸੀ ਮਨਮੁਖ ਫੜ ਕੇ ਬਾਵਾ ਬੜੇ ਬੜੇ ਚੰਸੂਰਵੇਂ ਕੇ ਕੋਟੀ ਦੇ ਚਲਾਏ ਕੇ ਰਣਕਾਲੀ ਗੁੱਸਾ ਖਾਏ ਕੇ ਖਾੜੇ ਤੋਂ ਗਾਲ ਮਾਰੇ ਜਾਕੇ ਕੱਚੇ ਮੂਰਖ ਦੀ ਮੂਰਖ ਕੱਚਿਆ ਹਾਂਜੀ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਆਪ ਭਿੜਦਾ ਪਰ ਆਪਣਾ ਆਪਾ ਮਾਰਿਆ ਹੋਇਆ ਹੈ ਆਪਣੇ ਆਪੇ ਨੂੰ ਮਾਰ ਕੇ ਭਿੜਦਾ ਹੈ ਕਿਸੇ ਨਾਲ ਨਹੀਂ ਭਿੜਦਾ ਉਹ ਕੋਲੇ ਨਹੀਂ ਭਿੜਦਾ ਆਪਣੇ ਆਪ ਨੂੰ ਮਾਰ ਕੇ ਭਿੜਦਾ ਆਪ ਕਾਰਜ ਰਚਿਆ ਇਹ ਕਾਰਜ ਰਚਿਆ ਆਪ ਭਿੜੇ ਮਾਰੇ ਆਪਣੇ ਆਪ ਨੂੰ ਫਿਰ ਵੀ ਮਾਰਦਾ ਆਪਣੇ ਆਪ ਦੀਆਂ ਗਲਤੀਆਂ ਫਿਰ ਜੇ ਕੋਈ ਜਾਂਦੀ ਹੈ ਆਪਣੇ ਆਪ ਦੀਆਂ ਗਲਤੀਆਂ ਤੇ ਦੁਨੀਆਂ ਨੂੰ ਤਾਂ ਦੱਸਦਾ ਹੀ ਹੈ ਮਾਰਦਾ ਆਪਣੇ ਆਪ ਨੂੰ ਹੀ ਇਹ ਬਿਵੇਕ ਦੀ हो ਹੋ ਰਹੀ ਹੈ ਜੀ ਇੱਥੇ। ਹਾਂ। ਕਿਉਂਕਿ ਉੱਥੇ ਤਾਂ ਚੰਡੀ ਦੀ ਗੱਲ ਸੀ ਇੱਥੇ ਚੰਡੀ ਦੀ ਜਗ੍ਹਾ ਇੱਥੇ ਪੁਰਸ਼ਵਾਚ ਗੱਲ है ਰਹੀ ਹੈ। ਇੱਥੇ ਬਿਵੇਕ। ਅੱਛਾ ਜੀ। ਬੁੱਲਦਾ ਇੱਥੇ। ਉੱਥੇ ਬਿਵੇਕ ਬੁੱਧੀ ਹੈ ਉਹ ਇਸਤਰੀ ਲਿੰਗ ਹੈ ਜੀ। ਉਹ ਮਾਤਾ ਵਿਣ ਕਲਮ ਮਸਵਾਣੀ ਹੈ ਸਭਨਾ ਖਸਮ ਇੱਕ ਹੈ ਜੀ ਤੇ ਸਾਰੇ ਨਾਲ ਸਭਨਾ ਹੀ ਇੱਕ ਇਹ ਸੱਚੇ ਸਭਨਾ ਖਸਮ ਹੈ ਗੱਲ ਕਰੋ ਸੱਚ ਦੀ ਜਿਹੜਾ ਸੱਚੇ ਥੱਲੇ ਬੈਠਾ ਉਹ ਖਸਮੇ ਹੋਰ ਬਣੇ ਬੈਠਾ ਉਹ ਪਹਿਲਾਂ ਇਹ ਪਤਾ ਕਰਕੇ ਆਵੇ ਖਸਮ ਦਾ ਹੌਂਦ ਗੁਰਮਤਿ ਜਾਣੀ ਹੈ ਗੁਰ ਗੁਰਨਾ ਦਾ ਜਾਣ ਲਿਆ ਹੈ ਪਰ ਕਰਮ ਦਾ ਪਤਾ ਇਸ ਗੱਲ ਦਾ ਪਰ ਮਨ ਨੂੰ ਨਹੀਂ ਪਤਾ ਇਸ ਗੱਲ ਦਾ ਉਹਨੂੰ ਖਾਣੇ ਖਸਮੇ ਹੋਰ ਬਣਾਏ ਬੈਠੇ ਨੇ ਪਤਾ ਨਹੀਂ ਕਿਹਦੀਆਂ ਕਿਤਾਬਾਂ ਪੜ੍ਹੀ ਜਾਂਦਾ ਸੀ ਪਤਾ ਨਹੀਂ ਕਿੱਥੋਂ ਸਿੱਖਿਆ ਲ ਲਈ ਪਤਾ ਨਹੀਂ ਜੀਹੋਂ ਬਰਮ ਗਿਆਨੀ ਕਹੀ ਜਾਂਦਾ ਨੇ ਉਹੀ ਖ਼ਤਰਬਣਾ ਹੋਇਆ ਹੋਰ ਕੌਣ ਨੇ ਉਹਨੇ ਤਾਂ ਜੀ ਆ ਗੱਲ ਕਹੀਓ ਖ਼ਤਰਬ ਦੇ ਰਿਹਾ ਜੇ ਕਹੀ ਹੈ ਸੱਚ ਹੈ ਖ਼ਤਰਬ ਲਿਖੇ ਲੇਖ ਪਿੰਡ ਕਲਮ ਸੁਭਾਣੀ ਤਾਂ ਹੁਕਮ ਨਾਲ ਛਾਤੀ ਤੇ ਲਿਖੇ ਨੇ ਅੰਦਰ ਲੇਖ ਉੱਤੇ ਕਲਮ ਦੀ ਲੋੜ ਹੈ ਨਾ ਉੱਤੇ ਸਿਆਹੀ ਦੀ ਲੋੜ ਹੈ ਸੁਭਾਣੀ ਤਾਂ ਹੀ ਕਲਮ ਤੋਂ ਭਰੇ ਹੀ ਲਿਖਿਆ ਜੀ ਉੱਧਰ ਜੋ ਹੁਕਮ ਸੀ ਲਿਖ ਲਿਆ ਅੰਦਰ ਗੁਰਬਾਣੀ ਪਿਚਾਰੀਆ ਲਿਖੀ ਹੋਈ ਜਾਂ ਨਿਰਾਕਾਰੀ ਗੱਲ ਹੈ ਜੀ ਜੋ ਆਪਣੇ ਆਦੋ ਲਿਖਿਆ ਹੈ ਇਹ ਆਪਣੇ ਕੋ ਕੀ ਹੈ ਪਰ ਲਿਖਿਆ ਹੁਕਮ ਦੇ ਵਿੱਚ ਰਹਿ ਕੇ ਹੈ ਜੀ ਕੁਰਬਾਨੀ ਪੱਕੀ ਬਾਣੀ ਹੈ ਸੰਗਤੀ ਮੇ ਲਾਪ ਹਰ ਗੁਣ ਸਦਾ ਵਖਾਣੀ ਹੈ ਨਾਨਕ ਸੱਚਾ ਸ਼ਬਦ ਸਲਾਹ ਹੈ ਪਛਾਣੀ ਹੈ ਸਤ ਸੰਗਤੀ ਮੇ ਲਾਪ ਸਤ ਦੇ ਨਾਲੇ ਮੁਨਾਫ ਰਹਿਣਾ ਹਰ ਵਕਤ ਮੇਲ ਕਿਥੇ ਹੈ ਸਤਿਗੁਰ ਨਾਲ ਮੇਲਾਤ ਸੱਚ ਨਾਲ ਜੁੜੇ ਰਹਿਣਾ ਜਿਹੜਾ ਸੱਚ ਨਾਲ ਜੁੜਿਆ ਉਹਦੀ ਸੰਗਤ ਕਰਨਾ ਸਤਜੰਤੀ ਮੇਲਾਤ ਜਿੱਥੇ ਹਰ ਕੋਣ ਸਦਾ ਬਖਾਨੀਏ ਜਿੱਥੇ ਸਦਾ ਹੀ ਹਰਗੁਣ ਮੁਖ ਦਾ ਬਖੀਰ ਚੱਲਦਾ ਰਹੇ ਹਰਗੁਣ ਦੀ ਚਰਚਾ ਚਲਦੀ ਰਹੇ ਹਰਗੁਣਾ ਦਾ ਗੁਰਬਾਣੀ ਦਾ ਵਿਚਾਰ ਚੱਲਦਾ ਰਹੇ ਉੱਥੇ ਹੀ ਮੇਲਾ ਹੋਰ ਮੇਲ ਕਿਥੇ ਹੋਰ ਮੇਲ ਨਹੀਂ ਸਕਦਾ ਨਾਨਕ ਸਦਾ ਸ਼ਬਦ ਸਲਾਹ ਹੈ ਸੱਚ ਪਛਾਣਨੀ ਹੈ ਸੱਚ ਜਬਤੀ ਸਿਰ ਚਲਾਇਓ ਤੇ ਕਾਲੀ ਹੋਰ ਕਿਸੇ ਬੰਦੇ ਦੀ ਨਹੀਂ ਕਰਦੀ ਕੋਈ ਵੀ ਹੋਵੇ ਪਰ ਉਹ ਉਪਦੇਸ਼ ਦੀ ਗੁਰਬਾਣੀ ਦੀ ਸਿਰ ਚਲਾ ਕਰਦੀ ਹੈ ਬੰਦੇ ਕਿਸੇ ਦੀ ਵੀ ਨਹੀਂ ਕਰਦੀ ਚਾਹੇ ਕੋਈ ਵੀ ਹੋਵੇ ਜਿਹੜਾ ਜਨਮ ਲਿਆ ਰੀ ਲਿਆ ਉਹਦੀ ਸਿਰ ਸਵਾਲ ਨਹੀਂ ਹੋ ਸਕਦੀ ਹੁਕਮ ਦੇ ਹੈ ਸੱਚ ਪਛਾਣ ਲਈ ਜੇ ਕਦਨ ਸੱਚ ਪਛਾਣਨਾ ਤਾਂ ਇਹ ਕਹਣਾ ਪਊ ਜੇ ਭੱਜਾ ਵਿੱਚ ਬਾੜ ਲਿਆ ਇਹ ਬੰਦਾ ਦਾ ਸਰੀਰ ਮਾਇਆ ਦਾ ਝੂਠ ਵਰਜੂਗਾ ਵਿੱਚ ਜੇ ਬੰਦੇ ਦੀ ਸਿਰਫਲਾ ਵਿੱਚ ਬਾੜ ਲਈ ਦ੍ਰਿਸ਼ਟੀ ਚਲੀ ਗਈ ਬੰਦਾ ਸਰੀਰ ਕਰਕੇ ਝੂਠ ਆ ਜੂਗਾ ਵਿੱਚ ਸੱਚੀ ਦੀ ਰਹਿਣਾ ਫਿਰ ਤੇ ਹੋਰ ਝੂਠ ਹਾਂਜੀ ਸਤ ਤੋਂ ਭਾਵ ਹੈਗਾ ਕਿ ਅੰਦਰ ਸਤ ਸੰਗਤੀ ਜਿੱਥੇ ਹਰ ਸਦਾ ਵਖਾਣੀ ਹੈ ਇਹ ਅੰਦਰ ਦੀ ਗੱਲ ਹੈ ਬਾਹਰ ਸਤ ਸੰਗਤ ਹੈ ਜੀ ਹਾਂ ਬਾਹਰ ਤੇ ਸਤ ਅੰਦਰ ਠੀਕ ਹੈ ਜੀ ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਨੀਏ ਸੱਚ ਤੱਕ ਪਹੁੰਚਣ ਵਾਸਤੇ ਸੱਚੇ ਸ਼ਬਦ ਦੀ ਸਲਾਣਾ ਜ਼ਰੂਰੀ ਹੈ ਜੀ ਬਿਲਕੁਲ ਸੱਚ ਤੱਕ ਪਹੁੰਚਣਾ ਨਹੀਂ ਤਾਂ ਮਾਇਆ ਦੇ ਅੜ ਜਾਗੇ ਇਹ ਸਰੀਰ ਦੇਖ ਲਿਆ ਕਿਸੇ ਦਾ ਟਾਈਮ ਤੇ ਲੈ ਗਾ ਉੱਥੇ ਅਟਕ ਜਾਗੇ ਬਾਰ ਬਾਰ ਮਾਇਆ ਤੇ ਅਟਕ ਕੇ ਮਾਇਆ ਤੇ ਆ ਕੇ ਅਟਕ ਜਾ ਤੁਸੀਂ ਦੀ ਸੁਰਤੀ ਤੇ ਸਰੀਰਾਂ ਤੇ ਸੁਰਤੀ ਚਲੀ ਜਾਵੇ ਮਾਇਆ ਤੇ ਅਟਕੀ ਹੋ ਠੀਕ ਹੈ ਜੀ ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ